ਉਸਤਤ ਕਦ ਕਦ ਜੀਵਾ ਉਸਤਤ ਕਦ ਕਦ ਜੀਵਾ ਉਸਤਤ ਕਦ ਕਦ ਜੀਵਾ tat kad kar jeeva us tat kad kar jeeva us tat kad kar jeeva सतत कने जी सास ने जीयो मेनू आप भी रसना पवित्र कर लो कहो बड़े प्यार नाल सारे ओसतत कने कने जी ओसतत कने कने ਕਦ ਜੀ ਮਾ ਉਸਤਤ ਕਦ ਕਦ ਜੀ ਮਾ ਅਬੂ ਉਸਤਤ ਕਦ ਕਦ ਜੋ ਤੁਮਰਾ ਜਸ ਗਾਵੇ ਕਰਤੇ ਜੋ ਤੁਮਰਾ ਜੋ ਤੁਮਨਾ ਜਸ ਜੋ ਤੁਮਰਾ ਜਸ ਕਰਤੇ ਕਹਿਰੇ ਹਨ ਮਹਾਰਾਜ ਕਿ ਜਿਹੜਾ ਤੇਰਾ ਜਸ ਕਰਦੇ ਹਨ ਉਸਤਤ ਕਰਦੇ ਹਨ ਸੇ ਚੂਰ ਉਹ ਨਾ ਜ਼ਿੰਦਗੀ ਵਿੱਚ ਕਦੀ ਪਛਤਾਨਦੇ ਹਨ ਚੁਰਦੇ ਹਨ ਨਾ ਉਹ ਕਦੀ ਮਰਦੇ ਬੜੇ ਪਿਆਰ ਨਾਲ ਸਾਰੇ ਉਸ ਤਤ ਕਰ ਕਰ ਜੀਮਾ ਉਸ ਤਤ ਕਰ ਕਰ ਜੀਮਾ ਆਦਿ ਜੁਗਤ ਪਗਤ ਨਿਕਾੜਾ ਖਾਦ ਜੁਗਤ ਪਗਤਨ ਕਾੜਾ ਆਦਿ ਜੁਗਤ ਪਗਤਨ ਗਦ ਪਗ ਤਨ ਕਾ ਦਾਖਾ ਉਸ ਸਤ ਕਰ ਜੀਵਾ ਤੂ ਸਤ ਕਰ ਜੀਵਾ ਉਸਤ रस मीठा नानक नाम महा रस मीठा नानक नाम महा रस मीठा ਤੱਕੜ ਕਰ ਜੀਵਾ ਉਸਤ ਕਮਲ ਕੀ ਟੇਕ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸਕੇ ਬਲਰਾਮ ਜਿਓ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸਕੇ ਬਲਰਾਮ ਜਿਓ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਕਰ ਤਿਸਕੇ ਬਲਰਾਮ ਜਿਓ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਆਰ ਜਿਤ ਸਿਮਰਤ ਦੁਖ ਕੋਈ ਨ ਲਾਗੇ ਪਬ ਚਲ ਪਰ ਉਤਰਾ ਇਆਂ ਖਟ ਇਆਂ ਖਟ ਪਿਆਰੇ ਆ ਇਆਂ ਇਨਾ ਖਟ ਪਿਆਰੇ ਆ ਖੱਟ ਚਲੋ ਹਰਨਾ ਹਈਆਂ ਖੱਟ ਚਲੋ ਹਰਲਾ ਹਈਆਂ ਖੱਟ ਚਲੋ ਹਰਨਾ ਹਈਆਂ ਖੱਟ ਚਲੋ ਹਰਨਾ ਆਕੇ ਬਸਨ ਸੁਹੇਲਾ ਪਿਆਰਿਆ ਇਆਂ ਖੱਟ ਖਟ ਪਿਆ ਦੇਈ ਖਟ ਇਆਂ ਖਟ ਪਿਆ ਇਆਂ ਖਟ ਇਆਂ ਖਟ ਪਿਆ ਨੇ ਸਾ ਸੰਗ ਜੋ ਯਾਦ ਆ ਗਿਆ ਮੈਂ ਜਦੋਂ ਹਰ ਰੋਜ਼ ਸੁਖਾਸਨ ਕਰਨਾ ਮੈਂ ਇਹੀ ਗਾ ਕੇ ਕਰਨਾ ਉਹਨਾਂ ਇੱਕ ਨਾਮਤਾਰੀ ਸਿੱਖ ਨੇ ਸਾਨੂੰ ਫੀਨਿਕਸ ਇੱਕ ਟੇਪ ਦਿੱਤੀ ਸਤਿਗੁਰੂ ਦੇ ਉਹ ਟੇਪ ਵਿੱਚ ਸ਼ਾਇਦ ਹੈ ਰਾਮ ਵੀ ਸਾਰੇ ਹਵ ਹੈ ਟੇਡੀ ਪਾਗ ਟੇਢੇ ਚਲੇ ਔਰ ਉਸੇ ਟੇਪ ਵਿੱਚ ਮੈਂ ਸੁਣ ਕੇ ਆਪ ਵੀ ਆਨੰਦ ਲੈਣਾ ਹਾਂ ਮੈਨੂੰ ਯਾਦ ਆਇਆ ਵੀ ਆਪ ਸਾਰੇ ਆਨੰਦ ਲੈ ਲਿਏ ਦੋ ਮਿੰਟ ਬਸ ਕਿਤੇ ਦੀ ਸਮਾਪਤੀ ਹੈ ਗਦੋ ਬੇਨੰਤੀ ਸੁਣ نسو هلہ پیار ایہہ کھٹ اینہ کرت پیار ایہہ کھٹ جے تیرا کھٹ پیار ایہہ کھٹ چلو ہتلا ایہہ کھٹ چلو ਮਸਨ ਸੁਹੇਰਾ ਗਾਇਆਈਆ ਖਟਾਈਆ ਖਾਟ ਖਾਟ ਖਾਟ ਨੂੰ ਸੁਸਾਤ ਸੰਗ ਜੀਓ ਪੁੱਲਾ ਚੁੱਕਾ ਨੀ ਖਿਮਾ ਬਖਸ਼ਣੀ ਲੱਖ ਗਲਤੀਆਂ ਪੁੱਲਣਾ ਖਿਮਾ ਕਰ ਰਹੀਆਂ ਬੜੇ ਪਿਆਰ ਨਾਲ ਜਿਵੇਂ ਸਭ ਤੇ ਆਪ ਤੇ ਸਤਿਗੁਰੂ ਮੇਰ ਪਰਿਆ ਹੱਥ ਰੱਖਣ ਸਤ ਸ੍ਰੀ ਅਕਾਲ ਜੀ ਜੋਗਰਦੇਵ ਜੀ ਕਹਿ ਰਹੇ ਸੀ ਮੈਂ ਵੀ ਉਹੀ ਕਹਿੰਦਾ ਤੁਸੀਂ ਸਾਰੇ ਆਖੋ ਬਈ ਸਤ ਸ੍ਰੀ ਅਕਾਲ